ਸੋ ਭਈ ਸੁਨਿ ਨਿਪ ਕਥਾ ਵਿਖਾਨਾ ਔਰੈ ਜੋ ਭਈ ਏਕ ਰਾਜ ਕੀ ਠੌਰੈ ਸ਼ਹਿਰ ਸੋਨਾਰ ਗਾਮ ਹੈ ਜਹਾਂ ਸਬਲ ਸਿੰਘ ਰਾਜਾ ਏਕ ਤਹਾਂ ਦਲ ਥੰਬਨ ਦੇਈ ਤਿਹਨਾਰੀ ਜੰਤਰ ਮੰਤਰ ਜੇਹ ਪੜੇ ਸੁਧਾਰੀ ਜੋਗੀ ਇੱਕ ਸੁੰਦਰ ਤਹ ਆਇਓ ਜੇ ਸਮ ਵਿਦ ਨਾ ਬਨਾਇਓ ਰਾਣੀ ਨਿਰਖ ਤਿਹ ਰਹੀ ਮਨਬੱਧ ਕ੍ਰਮ ਆਇਸੀ ਵਿਦ ਕਹੀ ਜੇਹ ਚਰਿੱਤਰ ਜੁਗਿਆ ਕਹ ਪਈਐ ਉਸੀ ਚਰਿੱਤਰ ਕੋ ਆਜ ਬਨਈਐ वृष्ट बिना ਬਦਰਾ गरज आए मंत्र सहित अंगरा बरखाए सून अस्त पृथ्वी पर पराय निर्ख लोग सब ही जिए डरे भूप मंत्रियों बोल पठायो होर विपर पुस्तकन दिखायो इन विघनन को कहा उपचारा तुम सब ही मिलकर हो विचारा तब लग वीर हांक ਏਕ ਕਾਜ ਉਭਰੇ ਜੋ ਕਰੈ ਨਾ ਤਰ ਪ੍ਰਜਾ ਸਹਿਤ ਨਿਰਪਮਰੈ ਸਭ ਹਿੰਦਖੀ ਗगन ਕੀ ਬਾਣੀ ਵੀਰ ਬਾਕਿਆ ਕਿਨਹੂ ਨਾ ਪਛਾਨੀ ਬਹੁਰ ਵੀਰ ਤਰਿਆ ਸੋ ਚਾਰੋ ਸੋ ਮੈਂ ਕਾਥੋ ਸੁਨੋ ਪਿਆਰੋ ਜੋ ਰਾਜਾ ਆਪਣੀ ਲੈ ਨਾਰੀ ਜੁਗਿਨ ਦੇ ਸੁਧਾਰੀ ਤਬ ਇਹ ਪ੍ਰਜਾ ਸਹਿਤ ਲਹਿ ਮਰੈ ਆਵ ਚਲ ਰਾਜ ਪ੍ਰਿਥੀ ਪਰ ਕਰੈ ਪ੍ਰਜਾ ਲੋਕ ਸੁਨ ਬਚ ਅਕੁਲਾਏ ਜਿਉਂ ਤਿਉਂ ਤਹਾਂ ਨਿਰਪਹਿ ਲੈ ਆਏ जुगी है दे दरब जतहारी भेद अपेद की गत ना बिचारी दोहरा प्रजा सैद राजा छला गई मित्र के नारे भेद अपेद भला बुरा सका ना कोई बिचारी इ श्री चित्र बख्याने त्रया चित्रे भूप मंत्री संबादे 356 74 समाप्त ਅਚਲਾਵਤੀ ਨਗਰੇਕ ਰਾਜਤ ਸੂਰ ਸਿੰਘ ਤਾ ਭੂਪ ਬਿਰਾਜਤ ਅੰਜਨ ਦੇ ਤਮਨ ਕੀ ਰਾਣੀ ਖੰਜਨ ਦੇ ਦੋਹਿਤਾ ਤਿਹ ਜਾਨੀ ਅਤਕ ਧੂਹ ਕੀ ਪ੍ਰਵਾ ਬਿਰਾਜੈ ਨਿਰਖ ਨਰੀ ਏਕ ਆਇਓ ਸੌਦਾਗਰ ਰੂਪਵੰਤ ਜਨ ਦੁਤੀਏ ਨਿ사ਕਰ ਜੋ ਅਬਲਾ ਤਿਹ ਰੂਪ ਨੇਹਾਰੈ ਰਾਜਪਾਟ ਤਜ ਸਾਥ ਸਿਧਾਰੈ ਸੋ ਆਇਓ ਨਿਰਬ ਤਰੀਕੇ ਘਰ ਤਾਰੈ ਰਾਸ਼ਤਾ ਨਿਰਖਾ ਤਿਹ ਦਿਗ ਭਾਰ मान बज क्रम एहु ऊपर भूली जन मद पी मतवारी झुली सिंह प्रचंड नाम ते नर को जान कर मुक्त काम के सिर को सखी एकता को अर पठाई कहियो वृथा सज्जन सो जाई सखी तुरत तिन तहा पहुंचायो जस नावक को तीर चलायो सकल क्वार तिन वृथा सुनाई मान बज रीज रहा सुखदाई नदी बाहत निरप ग्रह तर जहां ठाढ़ हुदियो ਡਾਰ ਦੇਗ ਮੈਂ ਕੁਰਬ ਹੈ ਐ ਛੇਦਰ ਮੂਦ ਤਾ ਕੋ ਸਭ ਲੈ ਹੈ ਉਪਰ ਬਾਂਦ ਤੁੰਬੂਰਾ ਦੈ ਹੈ ਇਹ ਚਿਤ੍ਰ ਮੋਹਿ ਤਾਹਿ ਮਿਲੈ ਹੈ ਜਬ ਤੁੰਬਰੀ ਲਖਿਓ ਟਿਗਾਈ ਕਾੜ ਭੋਗ ਦੀ ਜੋ ਸੁਖਦਾਈ ਇਹ ਬਿਦਬਦ ਤਾਸੋ ਸੰਕੇਤਾ ਦੂਤੀਗੀ ਨਿਰਪਤ੍ਰਿਯ ਜਨਕੇਤਾ ਡਾਰ ਦੇਗ ਮੈਂ ਕੁਰਬ ਹਾਈ ਬਾਂਦ ਤੁੰਬਰੀ ਤਾ ਪਹੁੰਚਾਈ ਜਬ ਬਾਤੀ ਤੁੰਬਰੀ ਤਾ ਆਈ ਆਵਦ ਕੁਰ ਲਖਾ ਸੁਖਦਾਈ ਐ ਤਾਹਾਂ ਤੇ ਦੀਗ ਨਿਕਾਰੀ ਲੈ ਪਲਕਾ ਉੱਪਰ ਬੈਠਾਰੀ ਉਸਤ ਭਾਂਗ ਫੀਮ ਮੰਗਾਈ ਧੂਖਾਟ ਪਰ ਬੈਠ ਚੜਾਈ ਚਾਰ ਪਹਰ ਤਾਸੋ ਕਰ ਭੋਗਾ ਭੇਦ ਨਾ ਲਖਾ ਦੂਸਰੇ ਲੋਗਾ ਇਹ ਮਿਲਤਾਸੋ ਰੋਜ ਬੁਲਾਵੈ ਕਾਂ ਭੋਗ ਕਰਤਾ ਹੈ ਪਠਾਵੈ ਹੂਪ ਸੈਤ ਕੋਈ ਭੇਦ ਨਾ ਪਾਵੇ ਨਿਤ ਪ੍ਰਤੀ ਆਪਣੋ ਮੂਡ ਮੁੰਡਾ ਵੈ ਇਤਿ ਸ੍ਰੀ ਤ੍ਰਿਤ੍ਰਵ ਪਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ 357 ਚਿਤਰਤ ਸਮਾਪਤ ਮਸਤ ਸੁਭ ਮਸਤੇ ਅਪਜੂ ਚਉਪਈ ਸੁਨ ਭੂਪ ਤੇ ਇੱਕ ਕਥਾ ਨਵੀਨੀ ਆਗੈ ਲਖੀ ਨਾ ਚੀਨੀ ਸੁੰਦਰਾਵਤੀ ਨਗਰੇ ਕਸੋ ਹੈ ਸੁੰਦਰ ਸਿੰਘ ਰਾਜਾ ਤਾਹ ਕੋ ਹੈ ਸੁੰਦਰ ਦੇ ਰਾਜਾ ਕੀ ਨਾਰੀ ਆਪ ਜਨਕ ਜਗਦੀਸ਼ ਸਵਾਰੀ ਤਾ ਜਾਤ ਨਾ ਪ੍ਰਭਾਵ ਖਾਨੀ ਐਸੀ ਹੁਤੀ ਰਾਏ ਕੀ ਰਾਣੀ ਤਾਹੇ ਕਿ ਸ਼ਾਹਾ ਕੋ ਪੂਤ ਅਪਾਰਾ ਕਨਕੇ ਕਹ ਕਹਾਵਦ ਸੁਨ ਬਾਣੀ ਕੋ ਕਿਲ ਕੋ ਕਰਈਂ ਕ੍ਰੋਧ ਜਰਤਕਾਰੀ ਹਵੈ ਗਈ ਨੈਣ ਨਿਰਖ ਕਰ ਜਲ ਦਿਨ ਜਾਨਾ ਤਾਤੇ ਜਲ ਮਹਿ ਕੀ ਆਪਿਆਨਾ ਅਲਕ ਹੀਰਨਾਗਿਨ ਰਿਸਪਰੀ ਚਿਤ ਮੈ ਲਜਤ ਪਤਾਰ ਹੈ ਬਰੀ ਸੋ ਆਇਓ ਰਾਜਾ ਕੇ ਪਾਸ ਸਾਉਂ ਸੌਦਾ ਕੀ ਜੀਵ ਮੈਂ ਧਰਿਆ ਸਾ ਸੁੰਦਰ ਦੇ ਨਿਰਖਿਤ ਤਿਹ ਕਈ ਸੋਦ ਬਦ ਤਜ ਬੌਰੀ ਹੋ ਵੈ ਬੁਲਾਵਾ ਕਾਮ ਭੋ ਕੀਏ ਕੀ ਚੇਰੀ ਹੀਰ ਗਈ ਜਸ ਹੀਰ ਅਹੇਰੀ ਪਾਪ ਦਾਬ ਨਿਪ ਜਾਏ ਜਗਾਇਓ ਧਾਮ ਤੋਰ ਤਸ ਕਰ ਇਕ ਕੇ ਸੰਗ ਕਰਤ ਬਿਲਾਸਾ ਚਰ ਦੇਖਹੁ ਤੇ ਭੂਤ ਮਾਸਾ ਸੁਨਤ ਬਚਨ ਨਿਰਪਦ ਕਰਿ ਸਹਾਇਓ ਖੜਗ ਹਾਥ ਲੈ ਤਾ ਸਿਧਾਇਓ ਜਬ ਅਬਲਾ ਪਤ ਕੀ ਸੁਦੀ ਪਾਈ ਅਦਿਕ ਧੂਮ ਤਾ ਦੀ ਅਜਗਾਈ ਸਭ ਕੇ ਨੈਨ ਤੁਮਰ ਸੋਂ ਭਰੇ ਅਸੂਆ ਟੂੜ ਬਦਨ ਪਰ ਪਰੇ ਜਬ ਰਾਣੀ ਇਹ ਘਾਤ ਪਛਾਨੀ ਮਿੱਤਰ ਲੰਘਾਏ ਹਿਏ ਹਰਖਾਨੀ ਆਗੇ ਸੋ ਕਰ ਕਾਢਾ ਜਾਰਾ ਤੁਮਰ ਭਰੇ ਦ੍ਰਿਗ ਨਿਰਪਨਾ ਨਿਹਾਰਾ ਔਚ ਨੇਤਰ ਜਬ ਹੀ ਗਇਓ ਤਾ ਕੋ ਨਾ ਪੁਰਖ ਨਿਹਾਰਾ ਵਹਾਂ उल्टि सी चेरी का कायो ए का दोष लगायो मूर्ख भूप न भेद बेचारा आगे कर त्रिय मित्र निकारा एत श्री त्रित्र त्रिया त्रित्रे भूप मंत्री संभादे 35873 समाप्त मस्त शुभ मस्त अपज्यों चौपाई सुन राजा एक जे छल नारी निकारा मित्र ਪੂਰਬ ਦੇਸ ਆਪੂਰਬ ਨਗਰੀ ਤਿਉ ਭਵਨ ਕੇ ਬੀਚ ਜਗਰੀ ਸ਼ਿਵ ਪ੍ਰਸਾਦ ਰਾਜਾ ਤਹ ਕੋ ਹੈ ਸਦਾ ਸਰਬਦਾ ਸ਼ਿਵ ਰਤ ਸੋ ਹੈ ਭਾਵਨ ਦੇ ਤਿਹ ਨਾਰਿ ਬਨੇਜੈ ਮਨ ਮੋਹਨ ਦੇਸ ਤਾ ਕਹਿ ਜੈ ਸਾਹ ਪੀਰ ਤਹ ਜਾਹਿਰ ਸੇਵਤ ਜਾਹਿ ਭੂਪ ਨਰ ਨਾਹਰ ਏਕ ਦਿਵਸ ਨਿਵ ਤਾਹ ਸਿਧਾਰਾ ਦੋਹਤਾ ਸਹਿਤ ਲੈ ਸੰਗਦਾਰਾ ਅੜਿਲ ਏਕ ਪੁਰਖ ਨਿਪਕੀ ਦੋਹਤਾ ਕਹ ਭਾਇੋ ਪਠੈ ਸਾਹ ਤਰੀ ਕਹ ਤਹੀ ਬੁਲਾਇਓ ਤਹੀ ਕਾਮ ਕੇ keel ਤਰਨਤਾ ਸੋ ਕੀਓ ਹੋ ਹਾਸਿਆ ਸਿ ਕਰ ਆਸਨ ਤਾਕੋ ਖਸ ਖਸ ਲਿਓ ਪੀਰ ਚੂਰਮਾ ਹੇਤ ਜੋ ਭੂਪ ਬਨਾਇਓ ਅਦਕ ਭਾਂ ਕੋ ਤਾਮੈ ਤਰਨ ਮਿਲਾਇਓ ਸਭ ਸੋਫੀ ਤੇ ਖਾਇ ਦਿਵਾਨੇ ਹੋਇ ਪਰੇ ਹੋ ਜਾਨ ਪ੍ਰਹਾਰ ਬਿਨਾ ਸਗਰੇ ਆਪੇ ਮਰੇ ਚੋ ਸੋਫੀ ਪਐ ਸਵੇ ਮਤਵਾਰੇ ਜਾਨ ਕਰ ਪਰੇ ਬੀਰ ਰਣ ਮਾਰੇ ਰਾਜ ਸੁਤਾ ਇਤ ਘਾਤ ਵਿਛਾਨਾ ਉਠ ਪ੍ਰੀਤਮ ਸੰਗ ਕੀ ਆਪਿਆ ਨਾ ਸੋਹੀ ਕਿਨੂ ਨਾ ਅੱਖੁ ਲਾਤ ਜਾਨ ਸ਼ੈਤਾਨ ਪ੍ਰਹਾਰੀ ਭੇਦ ਭੇਦ ਨ ਕਿਨਹੁ ਪਾਇਓ ਰਾਜ ਕੁਆਰ ਲੈ ਮੀਤ ਸਿਧਾਯੋ ਏਤ ਸਮਾਪਤ ਮਸਤ ਸੁਭ ਮਸਤੇ ਅਪਜੁ ਜੋਬਈ ਸੁਨ ਰਾਜਾ ਇੱਕ ਹੋਰ ਪ੍ਰਸੰਗਾ ਜਸ ਕੀ ਸੁਤਾ ਪਿਤਾ ਕੇ ਸੰਗਾ प्रबल सिंह राजा एक आति वाले अरि कांपत ताके डर जल थल श्री जग चूमक देहवारे कड़ी आव जन ब्रह्म सो नार तहा थो सुगर सैन खत्रीटा इश्क मुश्क के साथ लपेटा जगंग नाथ का पू सिधायो पुत्र कलत्र संग ले आयो जगंग नाथ को निर्ख दीवाला वचन बखाना पू पू ਹਮਰੋ ਪਾਪ ਪੁਰਾਤਨ ਗਇਓ ਸਫਲ ਜਨਮ ਹਮਰੋ ਅਬ ਭਇਓ ਜਗੰਨਾਥ ਕੋ ਪਾਇਓ ਦਰਸ਼ਨ ਔਰ ਕਰਾ ਹੱਥ ਪਗ ਪਰਸਨ ਤਬ ਲਗ ਭੂ ਸੁਤਾ ਤਹਾ ਆਈ ਪਿਤਾ ਸੁਨਤੇ ਅਸ ਕਹਾ ਸੁਨਾਈ ਸੁਨ ਬੈ ਸੈਨ ਆਜ ਹਿਆ ਕਰਿਓ ਜਿਹ ਇਹ ਕਹਿ ਤਸੀ ਕਹਾ ਵਰਿਓ ਪ੍ਰਾਤ ਉਠੀ ਤਹਾਤੇ ਸੋਈ ਜਬ ਬਚਨ ਕਹਾ ਪਿਤ ਸੰਗ ਇਹ ਬਿਦ ਤਵ ਸੁਗਰ ਸੈਨ ਖਤਰੀ ਜੋ ਆਹੀ ਜਗੰਨਾਥ ਦੀ ਨੀਮ ਤਾਹੀ ਰਾਜਾ ਬਚਨ ਸੁਨਾ ਇਹ ਬਿਦਜਵ ਐਸ ਕਹਾ ਤੋਇ ਤਾਕੇ ਸੰਗ ਤਬ ਜਗੰਨਾਥ ਜਾ ਕਹ ਤੂੰ ਦੀਨੀ ਹੰਸੋ ਜਾਤਨਾ ਤਾ ਸੋ ਲੀਨੀ ਭੇਦ ਅਪੇਦ ਨ ਕਛ ਜੜ ਪਾਇਓ ਇਹ ਛਲੇ ਆਪਣਾ ਮੂੰਡ ਮੁੰਡਾਇਓ ਜਗੰਨਾਥ ਕੋ ਬਚਨ ਬਚਾਨਾ ਰਾਜ ਸੁਤਾ ਲੈ ਮੀਤ ਸਿਧਾਨਾ ਇਤ ਸ੍ਰੀ ਚਿਤ੍ਰਪਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ 360 ਚਿਤਤਰ ਸਮਾਪਤ ਮਸਤ ਸੁਭ ਮਸਤ ਅਪਿਉਂ